ਨੈਣ ਨਾ ਦੇਖੇ ਸਾਧ ਸੇ ਨੈਣ ਬਿਹਾਲਿਆ ਕੰਨ ਨਾ ਸੁਨਹੀ ਨਾਦ ਕੰਨ ਮੁੰਦ ਘਾਲਿਆ ਨਾ ਕੋ ਕੋ ਸਾਧ ਜੇ ਨੈਣਾਂ ਦੇ ਨਾਲ ਤੇ ਉਹ ਅੰਦਰ ਇਹ ਜੀ ਦੇ ਦਰਸ਼ਨ ਕਰਨ ਨੇ ਬਾਹਰ ਬਹਿ ਲਿਆ ਹੋਇਆ ਫਿਰ ਤੇ ਹਾਲ ਤਾਂ ਫਿਰ ਤੋਂ ਬਾਹਰੋਂ ਦਰਸ਼ਨ ਕਰਨ ਅੰਦਰ ਵਾਲੀ ਗੱਲ ਭੁੱਲਿਆ ਹੋਇਆ ਕੰਨ ਸੁਣੀ ਇਹ ਨਾਦ ਆ ਬਾਹਰ ਲੈ ਕੰਨ ਨਾ ਮੀਰੀ ਸੁਣਨਾ ਉਦਲਿਆ ਨੂੰ ਸੁਣਨਾ ਕੰਨ ਨਾ ਸੁਣ ਇਹ ਹੀ ਸੀ ਨਾਦ ਕੰਨ ਬੰਦ ਕਰ ਲਿਆ ਅਗਲੇ ਜਨਮ ਵਿੱਚ ਕੰਨਾਂ ਦੀ ਲੋੜ ਨਹੀਂ ਰਹਿਣੀ ਤੈਨੂੰ ਫਿਰ ਚਾਹ ਰੇ ਨਾ ਹੋਵੇ ਵੀ ਕਦੇ ਵੀ ਇਹਨੂੰ ਕੰਨਾਂ ਦੀ ਲੋੜ ਨਹੀਂ ਹੈ ਨਾਦ ਨਹੀਂ ਸੁਣਦਾ ਹੈ ਅੰਤਰਾਤਮਾ ਦੀ ਆਵਾਜ਼ ਨਹੀਂ ਸੁਣਦਾ ਇਹ ਕੰਨੇ ਬੰਦ ਕੇ ਕਰ ਲਓ ਨਹੀਂ ਪਰ ਆਪਾਂ ਤਾਂ ਅੰਦਰਲੇ ਕਰਨਾਂ ਦੀ ਗੱਲ ਕਰਦੇ ਹਾਂ ਆਹੋ ਕਈ ਜੁੜੀਆਂ ਹੈਗੀਆਂ ਨੇ ਨਾ ਜਿਹਨਾਂ ਦੇ ਬਾਹਰਲੇ ਕੱਲ ਹੁੰਦੇ ਬਾਹਰੇ ਥੋੜੀ ਸੁਣਦੇ ਅੰਦਰਲੇ ਨੇ ਪਰ ਬਾਹਰੋਂ ਸੁਣਦੇ ਨੇ ਬਾਹਰੋਂ ਨਾ ਸੁਣ ਸਕਣ ਕੋਈ ਅੰਦਰੋਂ ਸੁਣਦੇ ਜਾਣਗੇ ਬਾਹਰੋਂ ਨਹੀਂ ਸੁਣ ਸਕਦੇ ਬਾਹਰੋਂ ਤਾਂ ਗਿਆਨ ਲੈਣਾ ਹੈਗਾ ਜਿਹਦੇ ਨਾਲ ਨਾਦ ਸੁਣਨਾ ਹੈ ਜੀ ਹੋਰ ਹੋਰ ਜੁਨੀਆਂ ਬਹੁਤ ਨੇ ਹੋਰ ਜੁਨੀਆਂ ਦੀ ਗੱਲ ਆਦਮੀ ਦੀ ਜੁਨਨੀ ਕਰਦੀ ਪਈ ਗੱਲ ਈ ਇੱਥੇ ਆਦਮੀ ਦੀ ਜੁਨਨੀ ਦੀ ਗੱਲ ਨਹੀਂ ਅੱਛਾ ਜੀ ਕੰਨ ਸੁਣਹੀਂ ਨਾਰ ਜੇ ਜੀਵ ਨੇ ਆ ਨਾਦ ਨਹੀਂ ਸੁਣਿਆ ਹਮੋ ਤੇ ਗੱਲ ਨੰਦਰੀ ਕਈ ਜੋ ਕੰਨ ਨਹੀਂ ਹੁੰਦੇ ਗੜੋਿਆਂ ਦੇ ਕੰਨ ਨਹੀਂ ਹੁੰਦੇ ਬਹੁਤ سارے ਜਾਨਵਰ ਜਿਨ੍ਹਾਂ ਦੇ ਕੰਨ ਨਹੀਂ ਹੁੰਦੇ ਹਨਾਂਾਂ ਦੀ ਬਹੁਤੀ ਜ਼ਿਆਦਾ ਲੰਬੀ ਉਗਲਦੀ ਹੁੰਦੀ ਚੱਪਦੇ ਵੀ ਕੰਨ ਨਹੀਂ ਹੁੰਦੇ ਤਖਤ ਨੇ ਮਨਸਪਤੀ ਇਹਨਾਂ ਦੇ ਵੀ ਕੰਨ ਨਹੀਂ ਹੁੰਦੇ ਬਹੁਤ ਥੋੜੇ ਨਹੀਂ ਜੋੜੀ ਦੇ ਕੰਨ ਹੁੰਦੇ ਨੇ ਤੋਂ 84 ਰਕਤ अच्छा जी ए त नहीं कहना चाहंदे कि जे नाद नहीं सुन रहे दा वले इन्होने होणे अपने कारण बंद कीते हुए हैं मुंड घाल लिया है मुंड घाल लिया दा भाव अगले जन्म वास्ते गल हो रही है कैसे जे हो रही है ऐ त बंद करके काल देंगे गां नु आपे बंदे रह जांगे कान नु सूत क लाग जांदा कान दी सूत ਕਰਨ मुंडे हुई हैं ਹੋਰ ਕੀ ਹੋਰ ਵਜੂਗੀ ਗਾਣੂ ਕਹੇ ਦਿੱਤੋਂ ਹੋਰ ਜ਼ਿਆਦਾ ਵਜੂਗੀ ਮੈਲ ਅੱਛਾ ਜੀ ਰਸਨਾ ਜਪੈ ਨਾਮ ਤਿਲ ਤਿਲ ਕਰ ਕੱਟੀਐ ਹਰ ਹਾਂ ਜਬ ਵਿਸਰੇ ਗੋਬਿੰਦ ਰਾਏ ਦਿਨੋਂ ਦਿਨ ਕੱਟੀਐ ਰਸਨਾ ਜਪੈ ਨਾਮ ਜੇ ਬੁੱਧੀ ਜਿਹੜੀ ਹੈ ਜੀਵ ਆਤਮਾ ਜਪਦੀ ਤਿਲ ਤਿਲ ਕਰ ਕੱਟੀਐ ਤਿਲ ਜਿੰਨੀ ਵੀ ਮੈਲ ਜਿਹੜੀ ਹੈ ਰਹਿਣ ਦੇਣੀ ਕੱਟਣੀ ਪਊਗੀ ਨਰ ਮਰਜੀ ਜਿ ਆਪਣੀ ਤੇਲ ਜਿ ਨਹੀਂ ਮਾਇਲ ਵੀ ਨਹੀਂ ਕਿਸੇ ਨੇ ਰਹਿਣ ਦਿਆ ਪਟਲੀ ਪਉ ਹਾਂ ਜਦ ਬਿਸਰੇ ਗੋਬਿੰਦ ਜਦੋ ਗੋਬਿੰਦ ਰਾਏ ਹਾਂ ਗੋਬਿੰਦ ਰਾਏ ਬਿਸਰ ਜਾਣਾ ਜਨੋਦਨ ਕੱਟੀਆ ਹਾਂ ਢੜੀ ਤਾਂ ਚਲਦੀ ਰਹਿਣੀ ਉਮਰ ਘਟ ਰਹੀ ਹੈ ਗੋਬਿੰਦ ਰਾਏ ਨਾਲ ਮਿਲਣ ਦੀ ਤਰਕੀਬ ਕਰ ਹਾਂਜੀ ਜੇ ਗੋਬਿੰਦ ਰਾਏ ਬਿਸਰੇ ਹੋਇਆ ਤਾਂ ਘਾਟਾ ਪੈ ਰਿਹਾ ਆਪਾਂ ਨੂੰ ਕੰਈ ਵੀ ਆ ਰਹੀ ਹੈ ਨੂੰ ਉਹ ਟਾਈਮ ਆਪਣਾ ਸਾਡਾ ਤਾਂ ਪਹਿਰੇ ਹੀ ਹੈ ਠੀਕ ਹੈ ਵੀ ਰਸਨਾ ਨੂੰ ਨਾਮ ਜਪਨਾ ਚਾਹੀਦਾ ਨਾਮ ਬਾਰੇ ਗਿਆਨ ਲੈਣਾ ਚਾਹੀਦਾ ਬੁੱਧੀ ਨੂੰ ਹੈ ਜੀ ਗਿਆਨ ਲੈਣਾ ਹੀ ਤਾਂ ਬੀਤ ਗਿਆ ਉਹਦਾ ਨੁਕਸਾਨ ਹੋ ਗਿਆ ਅਰਥ ਹੈ ਜਿਹੜੇ ਜੜ ਚ ਕਰਦੇ ਆ ਜੀ ਉਹ ਕਹਿੰਦੇ ਆ ਜੀਵ ਪਰਮੇਸ਼ਰ ਦਾ ਨਾਮ ਨਹੀਂ ਜਪਦੀ उस रत्ती रत्ती करके है। आप जपना नाम। जीव ਨੂੰ ਰਤਿ ਰਤਿ ਕਰਕੇ ਕੱਟ ਦੇਣਾ ਚਾਹੀਦਾ ਹੈ ਆਪ ਜਿ ਆਪਣਾ ਹੁੰਦਾ ਨਾਮ ਜੀਵ ਦਾ ਤਸੂਰ ਹੈ ਆਤਮਾ ਦਾ ਕੋਈ ਤਸੂਰ ਨਹੀਂ ਲੇਖਾ ਜੀਵ ਨਾਲ ਨਹੀਂ ਹੁੰਦਾ ਆ લાڑے ਐਡੇ بڑے ਆਦਮੀ ਜ਼ਿੰਮੇਵਾਰ ਟੀਕਾ ਕਰਨ ਵਾਲੇ ਹੀ ਵਿਗਿਆਨੀ ਦੇ ਗਾਹ ਕੀ ਹੱਲ ਹੋਊਗਾ ਜਿਹੜੇ ਇਹਨਾਂ ਨੂੰ ਬਣਨਗੇ ਹਾਂਜੀ ਤਾਂ ਆਮ ਜਿੰਨੇ ਆਪਣੇ ਆ ਡੇਰੇ ਵਾਲੇ ਸੰਤ ਕਹੋਂਦੇ ਆ ਉਹ ਇਸ ਤੁਕ ਨੂੰ ਆ ਬਹੁਤ ਦੁਰਵਰਤੋਂ ਕਰਦੇ ਆ ਉਹ ਡਰਾਉਣੇ ਲੋਕਾਂ ਨੂੰ ਤੁਹਾਡੀ ਜੀਵ ਘੱਟੀ ਜਾਊਗੀ ਆਹ ਜੋੜਦੇ ਨੇ ਪੈਰਾਂ ਦੀ ਖੇਪਾਈ ਹੋਈ ਆ ਧੂੜ ਧੂੜ ਕਹਿੰਦੇ ਨੇ ਉਹ ਤਾਂ ਫਿਰ ਉਹਨਾਂ ਨੇ ਬਾਹਰ ਭੁਖੀ ਸਭ ਕੁਝ ਕਰਤਾ ਕਹਿੰਦਾ ਭਾਵੇਂ ਇਹ ਹੈ ਵੀ ਜਦੋਂ ਤੱਕ ਨਾਮ ਦੇ ਬਾਰੇ ਖੋਜ ਨਹੀਂ ਕਰਾਂਗੇ ਤਦੋਂ ਤਕ ਸਾਡੇ ਪਾਪ ਜੋ ਅਸੀਂ ਕੀਤੇ ਐ ਹੁਕਮ ਦਾ ਵਿਰੋਧ ਕੀਤਾ ਉਹ ਘਟ ਨੀ ਸਕਦਾ ਹਾਂ ਜੀ ਠੀਕ ਹੈ ਇਹ ਤੋਂ ਵੱਡਾ ਘਾਟਾ ਹੈ ਸਾਨੂੰ ਇਹ ਦੱਸਣਾ ਚਾਹੁੰਦੇ ਆਂ ਜੀ ਹਾਂ ਜੀ ਠੀਕ ਹੈ ਜੀ ਨਾ ਕਿ ਬਾਹਰਲੀ ਜਿਹੜੀ ਜੀਵ ਦਾ ਅਸੀਂ ਡਰਾਵਾ ਦਿੰਨੇ ਆ ਵੀ ਇਹਨੂੰ ਕੋਈ ਬਾਹਰ ਬਾਅਦ ਚ ਮਰੇ ਤੋਂ ਬਾਅਦ ਕੋਈ ਜਾ ਕੇ ਕੱਟੇਗਾ ਠੀਕ ਹੈ ਜੀ ਇੱਥੇ 14ਵੇਂ ਛੰਦ ਦੀ ਸਮਾਪਤੀ ਹੈ ਜੀ